ਪੂਰਮ ਪੂਰਮ ਜੋਤ ਉਜਾਲਾ ਤੀਨ ਪਵਨ ਮੈਂ ਗੁਰਗੋਪਾਲਾ ਪੂਰਮੇ ਪੂਰਮੇ ਜੋਤ ਉਜਾਲਾ ਅੱਜ ਦਾ ਵਿੱਚ ਕੀਆ ਹੋਰ ਕੋਈ ਕਹਿ ਨਹੀਂ ਸਕਦਾ ਇਹ ਨੂੰ ਅੱਛਾ ਜੀ ਉਰ ਰਬੀ ਉਰ ਰਬੀ ਔ ਔਂਕਾ ਮੁਕਤਾ ਹੈ ਸੇ ਉਰਮ ਮਲ ਵਖਰ ਤੂਰਮ ਉਰ ਬੇਕੇ ਉਰ ਬੇਕੇ ਰਬੀ ਹੋ ਗਿਆ ਤੂੜ ਅਛਾ ਜੀ ਤੂਰਬੀ ਨਾ ਇਹਦਾ ਇਹਨਾਂ ਨੇ ਕਹਤਾ ਉਹਨੂੰ ਪਤਾ ਹੀ ਨਹੀਂ ਬਸ ਅੱਲਾਹ ਖੁਦ ਕੀਆ ਉਰ ਮਿਲਤਾ ਤੂਰਮ ਹੀ ਤੋੜੀ ਰਮ ਜੁਆ ਤੋੜੀ ਆਵਾਜ਼ ਹੀ ਤੇਰੀ ਅਛਾ ਜੀ ਵਾਹ ਇਹ ਯellow ਕਲ ਐਸ ਇਹ ਗਿਆਨਤਾ ਦੀ ਤੋੜ ਰਬੀ ਹੋਈ ਐ ਤੇ ਜ ਗਿਆਨਤਾ ਹੂੰ ਪਹਿਲਾਂ ਅੱਛਾ ਜੀ ਭਾਜੇ ਤੇ ਹਿਰਦੇ ਦੇ ਵਿੱਚ ਉਰਦੇ ਵਿੱਚ ਤੂ ਰਬੀ ਗਿਆਨਤੀ ਟੁੱਟੀ ਰਬ ਜਵੇ ਨਾ ਆ ਕੇ ਹੂੰ ਅ ਗਿਆਨਤਾ ਭਾਈ ਗਿਆਨ ਕੀਆ ਯਾਦਿਓ ਤੂ ਰੰਗ ਜਵੇ ਉਰੇ ਬੇਕ ਹੂੰ ਭਜੋਤੋ ਜਲ ਹੋ ਜਾਂਦਾ ਅੱਛਾ ਜੀ ਇਹਦੀ ਆਈ ਟੂੜ ਦੇ ਉੱਤੇ ਜੱਬ ਜਾਂਦੀ ਹੈ ਹੈ ਦੀ ਚਾਦਰ ਦੇ ਇਹਦੀ ਹੈ ਜਾ ਕੇ ਕੁਰਬਾਨੀ ਦੀ ਧੂੜ ਹੂੰ ਟੋਟੋ ਜਲ ਹੋ ਜਾਂਦਾ ਹੈ ਅੱਛਾ ਜੀ ਈਦ ਪਾ ਬਣਦੇ ਗੁਰੂ ਕੋ ਪਾਲਾ ਫਿਰ ਤਿੰਨ ਪਾ ਬਣਦੇ ਵਿੱਚ ਗੁਰੂ ਕੋ ਪਾਲੇ ਦਾ ਦਰ ਸ਼ੁਰੂ ਹੁੰਦਾ ਹੈ ਸਮਝ ਨਹੀਂ ਆਉਂਦੀ ਵੱਡਾ ਜਦੋਂ ਗੁਰੂ ਕੋ ਪਾਲੇ ਦਾ ਦਰ ਸ਼ੁਰੂ ਹੁੰਦਾ ਫਿਰ ਤਿੰਨ ਪਾ ਸੀ ਇਦਰੇ ਸੀ ਹਾਂ ਜੰਨਣ ਹੋਏ ਤੇ ਦੇਖਿਆ ਵਜਪੇ ਦਾ ਖਾਈ ਆਪੋ ਪਰ ਜੰਨਣ ਹੋਏ ਤੇ ٹھیک ہے یا تو رتین دا جان لویا یہ تے پبن دے گوردوں پالا اها ای دی سمجھ آلدے اے نی توں سچی اے اوہ اچانک ہو جندا جو تو جالا ہو جندا ٹھیک उगवेया असरूप दिखावे कर कृपा अपने घर आवे जब उगवे बहने को के उगवे उगवे आज आसरूप रूप प्रकट करता अच्छा जी फिर परा रूप प्रकट करता है अपना को बया होया हम्म शब्द प्रकट करता फिर असरूप दिखावे ਅਸਰੂਪ ਪਹਿਲਾਂ ਵੀ ਆਸੀ ਪੌਣ ਪਾਣੀ ਅਗਨੀ ਅਸਰੂਪ ਕਿ ਇਹ ਅਸਰੂਪ ਜਿਹੜਾ ਉੱਥੇ ਸੀਗਾ ਜੋਤ ਰੂਪ ਹੈ ਉਹਨੂੰ ਫੇਰ ਇੱਕ ਅਸਰੂਪ ਹੈ ਇਹ ਅਸਰੂਪ ਅੱਛਾ ਜੀ ਉੱਤੇ ਅਸਰੂਪ ਅੱਛਾ ਜੀ ਅਸਰੂਪ ਜੋ ਰੂਪ ਨਹੀਂ ਹੈ ਬਸ ਤੂ ਜੋਤ ਉਸ ਰੂਪ ਲੱਗਿਆ ਜੇ ਦੇਖ ਤੇ ਹੋ ਗਿਆ ਕਿ ਅਸਰੂਪ ਲੱਗਿਆ ਤਾਂ ਵਿਜਰੂਪ ਲੱਗਿਆ ਹਾਂਜੀ ਅਸਰੂਪ ਦਿਖਾਵੇ ਅਸਰੂਪ ਆਪਣਾ ਰੂਪ ਦਿਖਾਉਂਦਾ ਅੱਛਾ ਅਸਰੂਪ ਤਲਵਾਰ ਦਾ ਰੂਪ ਹੈ ਦਾ ਤਾਂ ਤਲਵਾਰ ਦੇ ਰੂਪ ਪੈਦਾ ਹੁੰਦੀ ਹੈ ਅੱਛਾ ਉਹ ਪੀੜ ਰੂਪ ਪੈਦਾ ਹੋਈ ਹੈ ਅਸਰੂਪ ਅਫਰੇ ਦਲਵਾਜ਼ ਰੂਪ ਹੈ ਜਿਹੜਾ ਅਖਰ ਉੱਪਰ ਆਇਆ ਸੀ ਉਹ ਅਸਰੂਪ ਸੀਗਾ ਇਹਨਾਂ ਨੂੰ ਉਹ ਅਸਰੂਪ ਸੀ ਇਹ ਅਸਰੂਪ ਹੈ ਨਹੀਂ ਇਹ ਅਸਰੂਪ ਠੀਕ ਹੈ ਉਹ ਕਰ ਕਿਰਪਾ ਆਪਣੇ ਘਰ ਆਵੇ ਅਣੀ ਕਿਰਪਾ ਆਪਣੇ ਘਰ ਆਵੇ ਕਿਰਪਾ ਕਰਕੇ ਆਪਣੇ ਘਰ ਆ ਜਾਂਦੇ ਅੱਛਾ ਜੀ ਉਨਵ ਵਰਸੈ ਨਿੱਜਰ ਤਾਰਾ ਉਤਮ ਸ਼ਬਦ ਸਵਾਰਣ ਹਾਰਾ ਤਾਰਾ ਹਾਂਜੀ ਉਨਾ ਵਰਸੈ ਦੀ ਤਾਰਾ ਬਿਲਕੁਲ ਝੁੱਕ ਕੇ ਇਹ ਝੁੱਕ ਕੇ ਵਰਸਦਾ ਹੈ ਚੱਬਲ ਲਾਉਦਾ ਹੈ ਜੀ ਹੋ ਕੇ ਵਰਸਦਾ ਦੇ ਵਿੱਚ ਵਰਸੇ ਚੱਬਲ ਲਾਏ ਉਤਮ ਸ਼ਬਦ ਹੋਈਏ ਸਵਾਲ ਦਾ ਉਸ ਨੂੰ ਉਤਮ ਸ਼ਬਦ ਕਹਿੰਦੇ ਨੇ ਕੋਈ ਸ਼ਬਦ ਗੁਰੂ ਆ ਉਹ ਜਵਾਲਣ ਆ ਰਿਹਾ ਹੈ ਅੱਛਾ ਜੀ ਨੀਚਰ ਤੋਂ ਕੀ ਬਣਦਾ ਜੀ ਨੀਚਰ ਨੀਚਰ ਨੀਚਰ ਅੱਜ ਦਾ ਪੋਸ਼ਬ ਨਹੀਂ ਚੜ ਬਰਸਦਾ ਹੈ ਅੱਛਾ ਜੀ ਇਹ ਮੇਰੇ ਵੀ ਚੜਦਾ ਚੜਦਾ ਦੀਆਂ ਇਤਾਂ ਬਰਸਦਾ ਫਿਰ ਵੀ ਅੱਛਾ ਜੀ ਠੀਕ ਹੈ ਜੀ ਇਸ ਇੱਕੋ ਦਾ ਜਾਣੇ ਪਿਓ ਆਪੇ ਕਰਤਾ ਆਪੇ ਦੇਉ ਇਸ ਇੱਕੇ ਪਿਓ ਇਸ ਇੱਕਾ ਇਹੋ ਜਿਹੜੀ ਇਕਤਾ ਹੈ ਅੱਛਾ ਐਸੀ ਜਿਹੜੀ ਇਕਤਾ ਹੈ ਇਹਦਾ ਜਿਹੜਾ ਭੇਜਣ ਜਾਣ ਲਵੇ ਜੀ ਤੇ ਹੋ ਗਿਆ ਉਹ ਕੋਈ ਜਾ ਕੇ ਸੱਚ ਚ ਕੋ ਹੋ ਗਿਆ ਇਸੇ ਕਾ ਐਸੀ ਇਕਤਾ ਜਿਹਨੇ ਭੇਜਣ ਆਪੇ ਕਰਤਾ ਆਪੇ ਦੇਉ ਕਰਤਾ ਵੀ ਆਪੇ ਦੇਵ ਵੀ ਆਪੇ ਦੇਵ ਕੀ ਹੈਗਾ ਜੀ ਦੇਵ ਤੋਂ ਕੀ ਭਾਵ ਹੈ ਦੇਵਤਾ ਇਹੋ ਤੋਂ ਦਿਲ ਨਾਲ ਨਹੀਂ ਅੱਦਲ ਲਈ ਚਿੱਤਾਂ